ਕਬਿਓ ਬਾਸ ਰਈਆ ਅੱਖਣ ਆਗੇ ਠਾੜ ਲਗੇ ਸਹੀ ਦੇਤ ਨਹੀਂ ਕਿਹ ਹੀਤ ਦਿਖਾਈ ਜਾ ਸੰਗ ਕੇਲ ਕਰੇ ਬਨ ਮੈਂ ਤਿਹ ਤੇ ਅਥੀ ਜੀ ਮੈਂ ਦੁਜਿਤਾਈ ਹੀਤ ਤਜਿਓ ਬ੍ਰਿਜ ਬਾਸਨ ਸੋ ਨਸ ਸੰਦੇਸ ਪਠਿਓ ਜੀ ਕੈ ਸੋ ਤਾਹੀ ਕੀ ਨਿਹਾਰਤ ਹੈ ਪਖਿਯੇ ਨੇ ਸਿਆਮ ਹਾ ਹਾ ਮੂਰੀ ਮਾਈ ਬਾਰਾ ਮਹਾ ਸੋਈਆ ਗੁਲਾਲ ਸਬਾਏ ਹਰਿ ਸੋ ਬਨ ਬੀਚ ਰਮੈ ਜਿਕਾਰ ਲੈ ਕਰ ਗਾਵਤ ਗੀਤ ਸਭੈ ਮਿਲ ਕੁਾਰਨ ਤੋਂ ਸਮੈ ਅਤ ਸੁੰਦਰ ਕੁੰਜ ਗਲੀਨ ਕੇ ਬੀਚ ਕਿਧਾਉ ਕਰ ਦੂਰ ਗਮੈ ਅਰ ਤਿਆਗ ਤਮੈ ਸਭ ਧਾਮਨ ਕੀ ਇਹ ਸੁੰਦਰੀ ਸਿਆਮ ਕੀ ਮਾਨ ਤਮੈ ਸਵਈਆ ਫੂਲ ਸੀ ਫੂਲ ਰਹੀ ਪਟ ਰੰਗਨ ਕੇ ਬਨ ਫੂਲ ਲੀਏ ਇਕ ਸਿਆਮ ਸੀਗਾਰ ਸੋ ਹੈ ਪੁਨ ਕੋਕਲ ਕਾ ਸਮਹੋਤ ਜੀਏ ਰਿਤ ਨਾਮ ਹੈ ਸਿਆਮ ਭਇਓ ਸਜਨੀ ਤੇ ਸਭ ਛਾਜ ਸੁਸਾਜ ਦੀਏ ਪਖ ਜਾ ਚਤੁਰਾਨਨ ਚੋਕ ਰਹੇ ਜੇ ਦੇਖਤ ਹੋ ਤੋ ਹਲਾਸ ਹੀਏ ਏਕ ਸਮੈ ਦੇ ਕਿੰਸ ਬਹਿ ਸੁਗਦਾਈ ਭੌਰ ਗੁੰਜਾਰਤ ਖੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ ਬਜਾਈ ਰੀਜ ਰਿਓ ਸੁਨ ਕੈ ਸੁਰ ਤਾ ਛਬ ਕੋ ਬਰਨਿਓ ਨਹੀਂ ਜਾਈ ਤੌਨ ਸਮੈ ਸੁਗਦਾਇਕ ਥੀ ਰਿਤ ਔਸਰੀ ਆਹੇ पै दुखदाई जेठ समय सखी तीर नदी हम खेलत चित उल्लास बढाई चंदन ਸੋ तन लीप सबै सो ਸੋ है सो तरणी छिरकाई लाए सुगंध पली कपर्यो पर ताकी प्रभाव बरनी नहीं जाई तौण समय सुखदाई की एहे अवसर श्याम बिना दुखदाई पौण प्रचंड चले जे अवसर और भघूलन ਧੂਪ ਲਗਾ ਮਾਸ ਮਾਸੂਰੀ ਸੋ ਲਗਾ ਸੁਖਦਾਇਕ ਸੀਤਲ ਜਾਈ ਸ਼ਾਮ ਕੇ ਸੰਗ ਸਭੈ ਹਮ ਖੇਲਤ ਸੀਤਲ ਪਾਟਿਕ ਕਾ ਵਿਛਟਾਈ ਤੌਣ ਸਮੈ ਸੁਖਦਾਇਕ ਧੀਰੇ ਤਿਓ ਸਰੀ ਆਹ ਪਈ ਦੁਖਦਾਇ ਸੋਇਆ ਜੋਰ ਕਟਾ ਆਏ ਜਹਾਂ ਸਹੀ ਬੂੰਦਨ ਮੇਘ ਭਲੀ ਛਬ ਪਾਈ ਬੋਲਤ छात्रिक दा दयो कण मूरन पै कण कोर लगाई ताई समय हम कानर के संग खेलत थी अति प्रेम बढ़ाई तौन समय सुखदायक थी रित हौ सरयाहे पै दुखदाई नेहक परय कबहु बिरय सही छाए लगाय ध्रुम की सुखदाई श्याम के संग फिरए सदनी रंग ਖੇਲਤ ਤਕਰੀੜ ਕਰੈ ਰਸ ਕੀ ਜਿਸ ਅਉਸਰ ਕੋ ਬਰਨਿਓ ਨਹੀਂ ਜਾਈ। ਸਿਆਮ ਸੁਨੈ ਸੁਖਦਾਇਕ ਤੀਰਿਤ ਸਿਆਮ ਮਿਨਾਇਤ ਭੀ ਦੁਖਦਾਇ। ਮਾ ਸਸਰੂ ਹਮ ਕਾਨਰ ਕੇ ਸੰਗ ਖੇਲਤ ਚਿਤ ਹੁਲਾਸ ਬਢਾਈ। ਕਾਨ ਤਹਾ ਫੁਨ ਗਾਵਤ ਤੋ ਅਤਿ ਸੁੰਦਰ ਰਾਗਨ ਤਾਨ ਬਸਾਈ। ਗਾਵਤ ਥੀ ਹਮ ਹੂ ਸੰਗ ਤਾਹੀ ਕੇ ਤਾ ਛਭ ਕੋ ਬਰਨਿਓ ਨਹੀਂ ਜਾਈ। ਤਾ ਸੰਗ ਮੈਂ ਸੁਖਦਾਇਕ ਤੀਰਿਤ श्याम बिना अब वी दुखदाई कातक की सखी रास बिखै रात खेलत थी हरसो चित लाई सेतह ग्वारन के पट ठा जब सेत नदी तह धार बहाई पूखन सेता गोपन के अरमूतन हार पली छब पाई तौण समय सुखदायक थी रित औ भई दुखदाई सोइया ਮੱਘਰ ਸਮਾਏ ਸਭ ਸ਼ਾਮ ਕੇ ਸੰਗ ਹੋਏ ਖੇਲ ਤਦੀ ਮਨ ਆਨੰਦ ਪਾਈ ਸੀਤ ਲਗੈ ਤਵ ਦੂਰ ਕਰੈ ਹਮ ਸ਼ਾਮ ਕੇ ਅੰਗ ਸੋ ਅੰਗ ਮਿਲਾਈ ਫੂਲ ਚੰਬੇਲੀ ਕੇ ਫੂਲ ਰਹੇ ਜਿਹੇ ਨੀਰ ਘਟਿਓ ਜਮਨਾ ਜੀ ਆਈ ਤੌਣ ਸਮਾਏ ਸੁਖਦਾਇਕ ਥੀਰਤ ਹੋਸਰਿ ਆਹੇ ਭਈ ਦੁਖਦਾਇ ਬੀਚ ਸਰਗਰਤ ਕੇ ਸਦਨੀ ਹਮ ਖੇਲ ਤ ਸ਼ਾਮ ਸੋ ਪ੍ਰੀਤ ਲਗਾਈ आनंद कहत ही मन ਮਨ ਮੈ ਤਜ सब ही जीव की दुचताई नार सब ब्रज कीन बिखै मन की तज कह सब संक कन्हाई ता ਸੋ सो सुखदायक थी रित श्याम बिना अब दुख भी दुखदाई सुैया माघ बिखै मिल कै हर सो हम सो रस रास की खेल ऊंचाई कान बजावत थो मुरली तहे अवसर फूल रहे ते ਫੂਲ पले पिखिया जेह ਰੀਜ रहे सुरराई कौन समय सुखदायक तीरेत श्याम बिना अब ही दुखदाई सोइया श्याम चितार सवै तहगवारन श्याम कह जोती बडभागी त्याग दई सुध और सवै हरि बातन के रस पीतर पागी एक गिरी तर है बिसदी कय सुद श्याम के खेलन की मिल कय सब ग्वारन रोमन लागी इथ गोपियन को विलाप पूर्णं अथ कान जू मंत्र गायत री सीखन समय सोइया उततए ए ग्वारन की भीड़ सा इथ कान कथा भईताए सुनाऊ लीप कै पू महगोबर सो कब श्याम कह सब प्रोह दिगाऊ कान बैठाए कय श्याम कह कब पय गर गए सो पवित्र ठाऊ ਮੰਤਰ ਗਾਇਤਰੀ ਕੋ ਤਹ ਦਇਓ ਜੋ ਹੈ ਭੁਗਿਆ ਧਰਨੀ ਧਰਨਾਉ ਸਵਈਆ ਡਾਰਜਨੇ ਉਸੋ ਸ਼ਾਮ ਪਰੈ ਫਿਰ ਕਹਿ ਤਹਿ ਮੰਤਰ ਸੋਸਰੌਨ ਮੈਂ ਦੀਨੋ ਸੋ ਸੁਨ ਕਹਿ ਖਰ ਪਾਏ ਪਰਿਓ ਗਰ ਗੈ ਬੋ ਭਾਂਤਨ ਕੋ ਧਨ ਦੀਨੋ ਅਸੂ ਬੜੇ ਗਜਰਾਜ ਉਸਤ ਦਇ ਪਟ ਸੁੰਦਰ ਸਾਜ ਨਵੀਨੋ ਲਾਲ ਪਨੇ ਅਰ ਮਨੀ ਤਹਿ ਪਾਏ ਪਰਿਓ ਹਿਤ ਆਨੰਦ ਕੀਨੋ ਮੰਤਰ ਪ੍ਰੋਹਤ ਦੈ ਹਰ ਕੋ ਤਨ ਲੈ ਬਹੁਤ ਮਨ ਵੈ ਸੁਖ ਪਾਇਓ ਤਿਆਗ ਸਵੈ ਦੁਖ ਕੋ ਤਬਹੀ ਅਤਿ ਮਨ ਆਨੰਦ ਬੀਜ ਬਿੜਾਯੋ ਸੋ ਤਨ ਪਾਇ ਤਹਾ ਤੇ ਚਲਿਓ ਚਲ ਕੈ ਆਪਣੇ ਗ੍ਰਹਿ ਭੀਤਰ ਆਯੋ ਸੋ ਸੁਨ ਮਿੱਤਰ ਪ੍ਰਸੰਨ ਪਐ ਗ੍ਰਹਿ ਤੇ ਸਭ ਦੂਰ ਪਰਾਯੋ ਇਤ ਫਰੀਦ ਅਸ਼ਮ ਸਕੰਧੇ ਪੁਰਾਣੇ ਵਿਚਤਰਨਾਟ ਗ੍ਰੰਥੇ ਕ੍ਰਿਸ਼ਨ ਅਵਤਾਰੇ ਸ੍ਰੀ ਕ੍ਰਿਸ਼ਨ ਜੂ ਕੋ ਗਾਇਤਰੀ ਮੰਤਰ ਸਿਖਾਏ ਜਗਿਓ उपवीत ਡਾਰਾ ਗਰੇ ध्याए ਸਮਾਪਤ मस्त ਅਥ उग्रसेन को राज दीवो सोइया मंत्र पुरोहित ते हर ले अपने निरप को फिर ता छडायो छूटत सो हर रूप निहार कै आए कै पाएन शीश झुकायाओ राज कहयो हर कहो तुम लेहो जू सो निरप कै जदुराए बैठायो आनंद भयो जग में जस भयो ਕਾਨ ਜਬੈਰ ਕੋ ਬਦ ਕਹਿ ਰਿਪ ਤਾਤ ਕੋ ਰਾਜ ਕਿਦੋ ਫਿਰਦੀਨੋ ਜੇਤ ਉਦਾਰ ਸੋ ਜਿਉ ਤਮਰੀ ਤੇ ਕੋ ਇਮ ਕਹਿ ਫੁਨ ਰੰਚ ਨਾ ਲੀਨੋ ਮਾਰ ਕੈ ਸਤਰ ਅਪੇਖ ਕਰੇ ਸੋ ਦਿਉ ਸਭ ਸੰਤਨ ਕੇ ਸੁਖ ਜੀਨੋ ਅਸਤਰਨ ਕੀ ਬਿਦ ਸੀਖਣ ਕੋ ਕਬ ਸਿਆਮ ਹਲੀ ਮੁਸਲੀਮਨ ਕੀਨੋ ਇਤ ਰਾਜਾ ਉਗਰ ਸੈਨ ਕੋ ਰਾਜ ਦੀ ਬੋ ਧਿਆਏ ਸੰਪੂਰਨੰ